ਸੇ ਲੋਕ ਮਹੱਲਾ ਤੀਜਾ ਹਸਤੀ ਸਿਰ ਜੂ ਅੰਕੁਸ਼ ਹੈ ਅਹਰਣ ਜੂ ਸਿਰ ਦੇ ਮਨ ਤਨ ਆਗੇ ਰਾਖੈ ਉਬੀ ਸੇਵ ਕਰੇ ਹਾਥੀ ਦੇ ਸਿਰ ਦੇ ਮਹਾਵਤ ਹੈ ਵਾਈ ਸ਼ਬਦ ਹੈ ਹਾਥੀ ਦੇ ਸਿਰ ਤੇ ਸਿਰ ਜੂ ਜੋ ਕਰਦੇ ਤੇ ਸੇ ਨਾਲ ਇਦਰ ਉਧਰ ਕਰਦੇ ਨਾਲ ਉਧਿਆਨ ਨੂੰ ਸਰਪੇ ਕਰਦੇ ਸਤਨਾ ਸੇਵਾ ਕਰੇ ਅੱਛਾ ਜੀ ਉਹ ਨਾਲ ਉਹ ਨਾਲ ਸੇਵਾ ਕਰੇ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟੀ ਕਾ ਇਹ ਗੁਰਮੁਖ ਇਸ ਤਰੀਕੇ ਨਾਲ ਗੁਰਮੁਖ ਹੋ ਜਾਂਦੇ ਆਹ ਬਹਾਤ ਬਾਹਰ ਆ ਜਾਂਦੇ ਬਾਹਰ ਆ ਕੇ ਸਭ ਰਾਜ ਗੁਰਮੁਖੀ ਕਰੇ ਗੁਰਮੁਖਾਂ ਦੀ ਬੁੱਝੀ ਹੈ ਜਦੋਂ ਤੇ ਉਹਦੀ ਕਿਰਪਾ ਰਾਜ ਕੀ ਹੈ ਕਿਤੇ ਲੋਕ ਤਾਂ ਕਹਿੰਦੇ ਆ ਉਹਦੇ ਵੀ ਸਾਥ ਥੋੜੀ ਦੁਕਾਨ ਸ੍ਰਿਸ਼ਟੀ ਤੇ ਰਾਜ ਸੱਚਖੰਡ ਵਾਲੇ ਕਰ ਰਹੇ ਆ ਇਹ ਭਾਵ ਹੈ ਜੀ ਹਾਂ ਜੀ ਉਹ ਸੱਚਖੰਡ ਚਲੇ ਜਾਂਦਾ ਇਹ ਗੁਣ ਧਾਰ ਕੇ ਤੇ ਫਿਰ ਸ੍ਰਿਸ਼ਟੀ ਤੇ ਰਾਜ ਸੱਚਖੰਡ ਦਾ ਹੀ ਹੈ ਤੇ ਇਸ ਗੱਲ ਵੱਲ ਇਸ਼ਾਰਾ ਹੈ ਬਿਲਕੁਲ ਜਦ ਹਕੂਮਤ ਦੇ ਵਿੱਚ ਸੁਭਾਇ ਗਿਆ ਉਹ ਉਹ ਕਉਪ ਰੂਪ ਹੋ ਗਿਆ ਫਿਰ ਨਾਨਕ ਗੁਰਮੁਖ ਬੁੱਝੀ ਐ ਜੇ ਆਪੇ ਨਜ਼ਰ ਕਰੀ ਗੁਰ ਅਰਨਾਮਨ ਗੁਰਮੁਖੀ ਗੁਰਮੁਖ ਦੇ ਬ੍ਰਿਖੀ ਕਹੇ ਤਾ ਜਿਸੇ ਕਿਰਪਾ ਹੋਊਗੀ ਦੂਜੀ ਪੈਰੀਏ ਗੱਲ ਪੱਗ ਦੇ ਫੁੱਲ ਦੀਏ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕੁੱਲ ਉਧਾਰੈ ਆਪਣਾ ਦਰਗਾਹ ਜਿਸ ਗੁਰੂ ਦੀ ਤੇ ਆਇਆ ਇਹ ਜਿਹੜੀ ਗੁਰਮੁਖਾਵਾ ਲੋਕ ਤੇ ਆਇਆ ਉਹ ਹਾਂਇ ਤੇ ਪ੍ਰਵਾਨ ਉਹ ਕੁਝ ਬਹੁਤ ਪ੍ਰਵਾਨ ਹੋ ਗਿਆ ਬਹੁਤ ਸਾਰੇ ਆਪਾਂ ਕਰੀਏ ਆਪਾਂ ਫਾਦਲ ਕੋ ਆਪਣੀ ਤੋਸਰ ਆ ਲੈ ਜੀ ਸਾਰੀ ਬਰੂਹਾਂ ਦੀ ਤੇ ਗੁਰਮੁਖੀ ਨਾਮ ਨੂੰ ਧਿਆਉਣਾ ਹੋਰ ਕਿਸੇ ਨਾਮ ਨੂੰ ਨਹੀਂ ਧਿਆਉਣਾ ਜੀ ਗੁਰੂ ਨਾਮ ਬਖਰ ਅਰ ਸਤਿਨਾਮ ਆਉਦੇ ਹੂ ਕੀ ਪਰਵਿਸ਼ਰ ਦਾ ਨਾਮ ਰੱਖੀਏ ਗੋਣਵਾਚ ਕਰ ਰੋ ਰੱਖਿਆ ਹੋਇਆ ਉਹਦਾ ਨਾਮ ਤਾਂ ਕੋਈ ਹੁੰਦਾ ਹੀ ਨਹੀਂ ਦੁਬਸਤ 90 90 ਤੱਕ ਦੇ ਰਹਾਵੇ ਇਹਦਾ ਨਾਮ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਈਆਂ ਗੁਰੂ ਸਰੂ ਰਹੀਓ ਕਿਹਾ ਹੋਇਆ ਜਦੋਂ ਵੀ ਉਹ ਪ੍ਰਗਟ ਹੁੰਦਾ ਪਰਮੇਸ਼ਰ ਪ੍ਰਗਟ ਕਰਦਾ ਉਦੋਂ ਹੀ ਇਹ ਸਖੀਆਂ ਇਕੱਠੀਆਂ ਹੁੰਦੀਆਂ ਨੇ ਮਿਲਦੀਆਂ ਨੇ ਇੱਕ ਦੂਜੇ ਨਾਲ ਗੁਰੂ ਕਿਉਂ ਲਿਖਿਆ ਜੀ ਇੱਥੇ ਔਰੀ ਗੁਰੂ ਮਿਲਾਈਆਂ ਤੋਂ ਕੀ ਭਾਵ ਹੈ ਵੀ ਪਰਮੇਸ਼ਰ ਨੇ ਮਿਲਾਈਆਂ ਜੀ ਜੇ ਉਹ ਪ੍ਰਗਟ ਹੁੰਦਾ ਆਈ ਮਿਲ ਲੈਣਗੇ ਅੱਗੇ ਜੇ ਉਹ ਪ੍ਰਗਟ ਫਿਰ ਤਾਂ ਦੇ ਨਾਲ ਹੋਏ ਬੇਲੇਪੁਰ ਵਾਲੇ ਸਾਰੇ ਆਪਣੀ ਆਪਣੀ ਇਹ ਲੜੜੀ ਲਗਾਉਂਦੇ ਫਿਰ ਸਾਰੇ ਬੇਸ ਤਾਂ ਜਾਂਦਾ ਹੁੰਦਾ ਹੈ ਜਦ ਦੇ ਸੇਵਕ ਗੁਰਪਾਸ ਇੱਕ ਗੁਰਕਾਰੇ ਲਾਈਆਂ ਇੱਕ ਸੇਵਕ ਦਾ ਗੁਰ ਸਤਗੁਰ ਨੇ ਕੋਲ ਫੜੋ ਉਹ ਸੇਵਾ ਹੀ ਕਰਦੇ ਇੱਕ ਕਾਰੇ ਲੱਗੇ ਨੇ ਬਰਬਾਦੀ ਦਾ ਪ੍ਰਚਾਰ ਕਰਨ ਲੱਗੇ ਨੇ ਬਰਬਾਹ ਦੇ ਕੋਲ ਇੱਕ ਸਿੱਖ ਵੀ ਸੀਗੇ ਲੈਣਾ ਅੱਗੇ ਨਿਕਲ ਗਿਆ ਸੀ ਉਹ ਕਾਰੇ ਲੱਤਾਂ ਸੀ ਜਿਹਦੇ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦਿਵਾਈਆ ਕਿਹਦੇ ਮਨਾਰਕਿਤ ਕਰਕੇ ਗੁਰੂ ਖਾਫੋਰ ਦਾ ਪਿਆਰ ਗੁਰੂ ਦੀ ਸਤਗੁਰ ਦਾ ਪਿਆਰ ਹੈ ਗੁਰਦੇਵ ਦਾ ਪਿਆਰ ਹੈ ਜਿਹਨਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦਿਵਾਈਆ ਉਹਨੂੰ ਭਾਉ ਪੈ ਗਿਆ ਉਹਨਾਂ ਨੂੰ ਉਹਦੇ ਅੰਦਰ ਭਾਉ ਆਇਆ ਤੇ ਪੈ ਗਿਆ ਹੋ ਗਿਆ अच्छा ਇੱਥੇ ਫਿਰ ਗੁਰੂ ਅਖਰ ਕਿਉਂ ਆਉਂਦਾ ਜੀ ਜਿਨ੍ਹਾਂ ਗੁਰ ਮਨ ਚਿੱਤ ਤਿੰਨਾ ਗੁਰੂ ਦੇ ਵਾਈਆ ਗੁਰੂ ਕਿਉਂ ਆਉਂਦਾ ਜੇ ਗਿਆਨ ਗੁਰੂ ਰਮ ਜਾਵਿਆ ਤਾਂ ਇਹਨਾਂ ਨੂੰ ਉਹਨੂੰ ਪ੍ਰੇਮ ਹੋਊਗਾ ਜੇ ਜਿਹੜਾ ਪ੍ਰਭ ਦਾ ਨਾਮ ਗੁਰ ਪ੍ਰਸਾਦ ਕਹਿੰਨੇ ਪਰਮ ਕਾ ਨਾਸ ਉਹ ਗੁਰ ਪ੍ਰਸਾਦ ਹਾਲੋ ਬਸਾਦ ਕੀ ਹੈ ਦੀ ਕਿਰਪਾ ਗੁਰਦੇ ਪ੍ਰਸਾਦ ਦਿੱਤਾ ਜਿਹੜਾ ਉਹ ਗੁਰੂ ਪ੍ਰਸਾਦ ਗੁਰੂ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਗੁਰ ਨੇ ਐ ਤਾਂ ਉਹਨਾਂ ਦਾ ਫਿਰ ਗੁਰੂ ਦੇ ਨਾਲ ਪ੍ਰੇਮ ਪੈ ਗਿਆ ਹਾਂਜੀ। ਹਾਂਜੀ ਹਾਂਜੀ। ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ। ਉਹ ਸਾਕਾਮੀ ਦਿੱਕੋ ਪਿਆਰ ਹੁੰਦਾ ਸਾਰਿਆਂ ਵਿੱਚ ਬਿਚਾਰ ਹੁਣ ਮੁੱਤਰ ਹੋਰ ਜਾਏ ਪਾਈ ਹੁਣ ਆਸਾਰ ਸਾਰਿਆਂ ਦਾ ਇੱਕ ਦੂਜੇ ਦਾ ਸਭ ਗੁਰ ਆਖ ਗੁਰੂ ਜਿਵਾਈਏ ਜੋ ਖਸਤ ਬੋਲਦਾ ਉਹੀ ਬੋਲੋ ਇਹਨਾਂ ਨੂੰ ਜੀਵਨ ਦਾ ਆਨ ਦੇਤਾ ਗੁਰੂ ਦੇ ਆਖਣ ਤੇ ਇਹਨਾਂ ਨੂੰ ਜੀਵਨ ਦਾ ਆਨ ਨਹੀਂ ਨਹੀਂ ਗੁਰ ਨੇ ਆਖਿਆ ਤਾਂ ਮਿਲੇ ਨਾ ਗੁਰ ਆਖੀ ਗੁਰੂ ਜਿਵਾਈਆਂ ਗੁਰ ਨੇ ਜੀਵਨ ਦਾਤ ਦਿੱਤਾ ਪਰ ਗੁਰ ਨੇ ਜੋ ਆਖਿਆ ਉਹ ਮੰਨਿਆ ਇਹ ਹੈ ਗੱਲ ਸਤਗੁਰ ਨੇ ਉਪਦੇਸ਼ ਕੀਤਾ ਗੁਰੂ ਜੀਵਨ ਦਾਤ ਸਾਰੇ ਜੋ ਸਤਗੁਰ ਬੋਲਦਾ ਉਹ ਹੀ ਬੋਲੋ ਐਂ ਤਾਂ ਪਾਪ ਗੁਰਬਾਣੀ ਦਾ ਗਿਆਨ ਤੁਸੀਂ ਸਤਗੁਰ ਦਾ ਗਿਆਨ ਜੋ ਹੈ ਉਹ ਬੋਲੋ ਠੀਕ ਹੈ ਜੀ ਉਸ ਤੋਂ ਇਲਾਵਾ ਕੁਝ ਬੋਲਣ ਦੀ ਲੋੜ ਨਹੀਂ ਗੁਰ ਆਖ ਗੁਰੂ ਜਿਵਾਈਆਂ ਗੁਰੂ ਆਖਿਆ ਹੈ ਗੁਰੂ ਨੇ ਜੀਵਨ ਦਾ ਕੀਤਾ ਜੀਵਨ ਦਾ ਦਿੱਤਾ ਹੁਣ ਅੱਛਾ ਇਹ ਫਿਰ ਜੀਵਨ ਦਾਨ ਚੌਥਾ ਪਦਾਰਥ ਦੀ ਗੁਰੂ ਨੇ ਕੀਤਾ ਗਿਆ ਬਾੜੀ ਗੁਰੂ ਕਰ ਰੋ ਕਰ ਲਿਆ ਕਹਿ ਲਓ ਹੋਇਆ ਜਿਹੜਾ ਨਾਮ ਨਾਮ ਮੁcke ਨਾਮ ਤੋਂ ਕਿਰਪਾ ਕਰੋ ਫਰੇ। ਗੁਰ ਦੇ ਨਾਮ ਬਲੇ ਤਾਲ ਜੀਵ। ਜਿਉ ਹੈ ਨਾਮ ਨਾਲ ਹੋਇ ਤੈ ਚ ਨਹੀਂ ਹੈ ਇਹ ਨਾਮ। ਇਹ ਨਾਮ ਸਿੱਧਾ